ਇਹ ਸਿਰਫ 2 ਵਾਰਾਂ ਇਸ ਤਰ੍ਹਾਂ ਨਹੀਂ ਆਇਆ ਆਦਿ ਗ੍ਰੰਥ ਦੇ ਵਿੱਚ ਜਾਂ ਪੋਥੀ ਸਾਹਿਬ ਵਿੱਚ ਜਿਨ੍ਹਾਂ ਵਿੱਚ ਕਿ ਸ਼ਲੋਕ ਨਹੀਂ ਹੈ ਹਾਂਜੀ ਹਾਂਜੀ ਇੱਕ ਤਾਂ ਹੈਗੀ ਹੈ ਰਾਮਕਲੀ ਰਾਗ ਵਿੱਚ ਸੱਤੇ ਬਲਵੰਡੇ ਵਾਲੀ हर का नाम त्याए कै ओ हरिया भाई कर्म लिखन ते है। पाई है ए ऋतु सुहाई का नाम त्याए कै हरके नाम ते अन रख जद हरके रोंज ना ते हल जुड़ गया ए समझला जानू पदार्थ विचू हरा हो जाएगा बीज दा जबे होना हरा होना बीज तो वृक्ष दे रूप च फुक कर आणा हरिया भाई ना मिलूंगा ਹਰਾ ਹੋਊਗਾ ਬੀਤੋ ਬਰਸ਼ ਦੇ ਰੂਪ ਚ ਫੁੱਗੜਿਆ ਹੋਊਗਾ ਫੁੱਗੜਿਆ ਹੋਊਗਾ ਹਰਾ ਹੋ ਜਾਊਗਾ ਰੋ ਹਰਿਆ ਭਾਈ ਕਰਮ ਲਖੰਤਾ ਪਾਈ ਹੈ ਪ੍ਰਾਪਤੀ ਕਿਵੇਂ ਹੋਈ ਹੈ ਕਿਰਪਾ ਹੋਈ ਹੈ ਸੁਰ ਦਰਗਾਹੋਂ ਲਿਖਿਆ ਸੀ ਯਾ ਚਲਾ ਜਾ ਤੈਨੂੰ ਲੋਗੜੂਗਾ ਐਡ ਕੀ ਨਾਮ ਤੈਨੂੰ ਮਿਲੇ ਜਾਣਾ ਪ੍ਰਬੰਧ ਕੀਤੇ ਪਹਿਲੇ ਇਹ ਸਹਾਈ ਰੁੱਤ ਹੈ ਵਧੀਆ ਰੁੱਤ ਤੇ ਤਰੁਪੇ ਚ ਇਹ ਰੁੱਤ ਸਹਾਈ ਔਰ ਉੱਤੇ ਚ ਭੇਜਿਆ ਪ੍ਰਸਾਦ ਤੇ ਉੱਤੇ ਚ ਭੇਜਿਆ ਮੇਗਾ ਘ ਵਰਸ ਰਿਹਾ ਤੂੰ ਜਾ ਕੇ ਨਾਮ ਲੈ ਲੈ ਨਾਮ ਤਾਂ ਤੂੰ ਵੀਰ ਤਾਂ ਹੈਗਾ ਹੀ ਆ ਵੇ ਕੇ ਦਾ ਰਾਮ ਉਦਕ ਰਾਮ ਉਦਕ ਲੈ ਲੈ ਤੇ ਜਬ ਠੀਕ ਹੈ ਜੀ ਵਣ ਤ੍ਰਿਣ ਤ੍ਰਿਪਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਇਹਨੇ ਬਰਸਾਤ ਦੇ ਵਿੱਚ ਛੋਟੇ ਟਲਕੇ ਤੋਂ ਲੈ ਕੇ ਵੱਡੇ ਵੱਡੇ ਦਰਖਤ ਸਾਰੇ ਬੋਲ ਜਾਂਦੇ ਨੇ ਪੱਤੇ ਕੱਢਿਆ ਉਹਦੇ ਦੇ ਹਰੇ ਭਰੇ ਹੋ ਜਾਂਦੇ ਨੇ ਇਵੇਂ ਛੋਟੇ ਤੋਂ ਛੋਟੇ ਜੀਵ ਤੇ ਪੁੱਤ ਵਾਲੇ ਤੇ ਲੈ ਕੇ ਉੱਚੇ ਤੇ ਉੱਚੀ ਗੁਦਾੜਾ ਜਦੋਂ ਨਾਂ ਦਾ ਪ੍ਰਚਾਰ ਹੁੰਦਾ ਸਾਰੇ ਹੀ ਬੋਲਦੇ ਸਾਰੀ ਖੁਸ਼ੀ ਹੁੰਦੀ ਆ ਗੱਲ ਹੈ ਅਸਲੀ ਹੋਰ ਜਿਹੇ ਹੋਤੇ ਨੇ ਜਿਹੜੇ ਸਾਰੇ ਸਾਰੇ ਹੀ ਸੁਲਝ ਜਾਂਦੇ ਸਾਰਿਆਂ ਨੂੰ ਕੁਛ ਨਾ ਕੁਛ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਠੀਕ ਹੈ ਜੀ ਇਹ ਆਰਾਮ ਤੱਕ ਦੀ ਗੱਲ ਹੈ ਜੀ ਉਹ ਜਿਹਾ ਗੁਰਬਤ ਦੀ ਸਹੀ ਵਿਆਖਿਆ ਪ੍ਰਗਟ ਹੁੰਦੀ ਹੈ ਸੰਸਾਰ 'ਚ ਨੂੰ ਫਿਰ ਉਹਨਾਂ ਹੋਇਆ ਬਰਸੋ ਕਿਰਪਾਤਾਰ ਉਦੋਂ ਹਰ ਕਿਸੇ ਦੇ ਕੰਨ 'ਚ ਗੱਲ ਪੈ ਜਾਂਦੀ ਹੈ ਹਰ ਕੋਈ ਬਦਲ ਲੱਗ ਜਾਂਦਾ ਹਾਂ ਇਹ ਗੱਲ ਠੀਕ ਹੈ ਆ ਸਰਬ ਸਹੀ ਹੈ ਪਕੜ ਚੋਣਾਂ ਦੇ ਉਹਨਾਂ ਨੇ ਕਿਹਾ ਜਿਹਦੀ ਬੁੱਧੀ ਆਪ ਆਪਣੀ ਜਿਹਦੀ ਬੁੱਧੀ ਹੈ ਉਹਦੀ ਸਭ ਜੋਰ ਆ ਜਾਂਦੀ ਉਹਨੇ ਗੌਰ ਵਾਜਰਦੇ ਨੇ ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ ਮਿਲ ਸਾਧੂ ਸੁਖ ਉਪਜੇ ਸਾਰੇ ਆਪਣੇ ਅੰਤਰਾਧੂ ਨਾਲ ਜੁੜ ਜਾਂਦੇ ਨੇ ਸਾਰੇ ਹੀ ਸੁਖੀ ਹੋ ਜਾਂਦੇ ਨੇ ਆਹ ਜਿਹੜੀ ਭਰਮ ਦੀ ਛਾਈ ਆ ਪਾਇਆ ਸੰਤਾਂ ਦਾ ਲੋਕਾਂ ਦਾ ਗੁਰਮਤਾਲਿਆਂ ਦਾ ਪੁਰਨ ਪਾਪ ਦਾ ਭਰਮ ਮਾਲਾ ਦਾ ਭਰਮ ਇਹ ਸਾਰੇ ਲੈ ਜਾਂਦੇ ਨੇ ਛਾਈ ਛਾਈ ਦੀ ਪਰਬ ਇਹ ਸਾਰੇ ਭਰਮ ਦੂਰ ਹੋ ਵੀ ਇਹਨਾਂ ਨਾਲ ਨਹੀਂ ਕੁਝ ਮਿਲਦਾ ਸਭ ਬਕਵਾਸ ਕਰਦੇ ਨੇ ਇਹਨਾਂ ਦੀ ਮਨਤਾ ਹੀ ਰਤਬ ਹੋ ਜਾਂਦੀ ਹੈ ਸਗਲ ਮਥਲ ਤੇਨੋ ਦਾ ਅੰਤ ਹੋ ਜਾਂਦਾ ਹੈ ਇਹਨਾਂ ਦੇ ਤੱਕ ਬੱਜਰ ਕੁਠਾਰ ਚੱਲ ਜਾਂਦਾ ਹੈ ਜਿਹੜਾ ਬੱਜਰ ਕੁਠਾਰ ਹੈ ਨਾ ਉਹ ਇਹਨਾਂ ਮੱਤਾਂ ਤੇ ਚੱਲਦਾ ਫਿਰ ਕੁਹਾੜਾ ਇਹਨਾਂ ਨੂੰ ਕੋਈ ਨਹੀਂ ਬੰਦਉ ਇਹਨਾਂ ਦੇ ਲਾਹੂ ਲਾਹੇ ਰਖ ਦਿੰਦਾ ਨਾਮ ਸਾਧੂ ਇੱਥੇ ਚਿੱਤ ਨੂੰ ਕਿਹਾ ਜੀ ਇੱਕ ਪਰਮੇਸ਼ਰ ਨੂੰ ਕਿਹਾ ਹਾਂ ਆਪਣੇ ਮੂਲ ਨੂੰ ਅਸਲ ਤੇ ਸਾਧੂ ਜਾਦ ਹੈ ਜਾਂ ਦੋ ਇੱਕ ਹੋ ਜਾਣ ਅੱਛਾ ਜੀ ਸਾਧੂ ਅਸਲ ਬੋਚਨ ਕਦਾ ਸਾਧ ਹੈ ਜਦ ਜਿੱਤ ਵੀ ਸਾਧ ਹੋ ਗਿਆ ਫਿਰ ਸਾਧੂ ਹੋ ਗਿਆ ਹੈ ਇੱਕ ਹੋਇਆ ਹੋਇਆ ਸਾਧੂ ਹੈ ਬਿਲ ਸਾਧੂ ਠੀਕ ਹੈ ਜੀ ਮਿਲਿਆ ਹੋਇਆ ਮਿਲ ਕੇ ਇਹ ਸਾਧੂ ਬਣ ਗਿਆ ਜੀਵਿਕ ਹੋ ਗਿਆ ਅੱਧਾ ਸਾਧ ਸੀ ਦੋਏ ਕੋ ਕੇ ਸਾਧੂ ਹੈ ਸਾਧੂ ਦੀ ਡਿਗਰੀ ਤਾਂ ਬਧੀ ਫਿਰ ਇੱਕ ਭਾਵ ਕਿ ਸੁਖ ਸਾਗਰ ਵਿੱਚ ਹੁਣ ਉਪਜਣਾ ਇਹਦਾ ਲਾਜ਼ਮੀ ਹੈ ਜੀ ਅੰਦਰੋਂ ਹੀ ਸੁਖ ਪੈਦਾ ਹੋ ਰਿਹਾ ਅੰਦਰੋਂ ਸੁਖ ਓ ਅੰਦਰੋਂ ਜੇ ਜੇ ਅਗਰ ਤੁਸੀਂ ਬੁੱਝ ਗਈ ਨਕੜੇ ਨਾ ਤੂਹ। ਤੇ ਸ਼ਾਂਸ਼ੀ ਅੰਦਰੋਂ ਪਹਿਰਾ ਦੁਖੀ ਕਰਦੀ ਉਹ ਸਭ ਛੱਡੀ ਹਵਾ ਦਰੋਂ ਝੜ ਗਈ ਜੇ। ਪਰਫ ਕਰ ਗਿਆ। ਹੋ ਗਿਆ ਠੀਕ ਹੈ ਜੀ। ਨਾਨਕ ਸਿਮਰੈ ਏਕ ਨਾਮ ਫਿਰ ਬੋਹੜ ਨਾ ਧਾਈ। ਇਸ ਵੇਲੇ ਇਸ ਦਸਤ ਜਿਹੜਾ ਨਾਮ ਸੰਭਲ ਲਿਆ। ਅਤਵਾਰਾ ਜਨਮ ਦਿਵਸ ਤਾਂ ਹੋ ਸਕਦਾ ਗਰੰਟੀ ਐ ਜੇ ਇੱਕ ਨਾਮ ਇਸ ਜੇ ਕੋਈ ਨਾਮ ਜਿਹੜਾ ਹੈਗਾ ਹੁਕਮ ਨਾਲ ਹੀ ਢੁੱਟ ਜਵੇ ਗਰੰਟਡ ਐ ਨਹੀਂ ਜਨਮ ਹੋਊ ਦੁਆ ਸਰਬੋਣਤਾ ਹੀ ਗਰੰਟੀ ਨੇ ਦੀ ਗੁਰਬਾਣੀ ਉਹਦਾ ਦੁਆ ਜਨਮ ਨਹੀਂ ਹੋਊਗਾ ਕਾਵਾ ਕਰਦੀ ਐ ਬਾਣੀ ਠੀਕ ਐ ਜੀ ਇੱਥੇ ਪਹਿਲੀ ਪੌੜੀ ਸਮਾਪਤੀ ਐ ਜੀ ਇਹਦੇ ਸ਼ੁਰੂ ਚ ਲਿਖਿਆ ਹੋਇਆ ਜੀ ਵਸੰਤ ਕੀ ਵਾਰ ਮਹੱਲ ਪੰਜਵਾਂ ਹਾਂ ਇੱਥੇ ਮਹੱਲ ਪਹਿਲਾ ਸਿਰੀ ਰਾਗ ਦੋ ਬਾਰੇ ਸ਼ਬਦ ਆਉਂਦਾ ਇੱਕ ਵਾਰ ਹੁਣ ਇੱਥੇ ਕਿ ਜਿੱਥੇ ਅਕ ਸ਼ਬਦ ਮਹੱਲ ਵਰਤਿਆ ਸਿਰੀ ਰਾਗ ਮਹੱਲ ਪਹਿਲਾ ਆਉਂਦਾ ਹੈ ਜੀ ਇੱਕ ਜਗ੍ਹਾ ਇਹ ਆਉਂਦਾ ਹੈਗਾ ਪੰਨਾ ਨੰਬਰ 19 ਤੇ ਪਰ ਇੱਥੇ ਸਿਰੀ ਰਾਗ ਤੇ ਤਾਂ ਔਂਕੜ ਹੈ ਪਰ ਮਹੱਲ ਤੇ ਔਂਕੜ ਨਹੀਂ ਆਉਂਦਾ ਉੱਥੇ ਮਹੱਲ ਤੇ ਵੀ ਔਂਕੜ ਚਾਹੀਦਾ ਸੀ ਪਰ ਤੇ ਸਿਰੀ ਰਾਗ ਨਾਲ ਤਾਂ ਔਂਕੜ ਹੈ ਮਹੱਲ ਨਾਲ ਨਹੀਂ ਹੈ ਪਰ ਇੱਥੇ ਮਹੱਲ ਨਾਲ ਵੀ ਔਂਕੜ ਹੈਗਾ ਨਾਲ ਪਰ ਉਹ ਕੀ ਹੋ ਗਿਆ ਨਾ ਤਾਂ ਨਹੀਂ ਆਉਂਦਾ ਵਾਰ ਨਾਲ ਬਸੰਤ ਕੀ ਆ ਗਿਆ ਨਾ ਇਹ ਤਾਂ ਰੂਲ ਹੈ ਜੇ ਇੱਕ ਜਗ੍ਹਾ ਔਂਕੜ ਹੈਗਾ ਦੂਜੀ ਜਗ੍ਹਾ ਆਏਗਾ ਹੀ ਆਏਗਾ ਜੀ ਰਾਗ ਨਾਲ ਜੇ ਔਂਕੜ ਹੈ ਤਾਂ ਮਹੱਲ ਨਾਲ ਵੀ ਔਂਕੜ ਚਾਹੀਦਾ ਇੱਥੇ ਵੀ ਤਾਂ ਔਂਕੜ ਆਉਂਦਾ ਨਾ ਮਹੱਲ ਨਾਲ ਇੱਕ ਗੱਲ ਹੋਰ ਹੈ ਜਿੱਥੇ ਦੁਬਾਰਾ ਆਉਂਦਾ ਸਿਰੀ ਰਾਗ ਮਹੱਲ ਪਹਿਲਾ ਜਲ ਮੋਹ ਕਸਮਸ ਕਰ ਇੱਥੇ ਸ੍ਰੀ ਰਾਗ ਤੇ ਵੀ ਔਂਕੜ ਹੈ ਮਹਲ ਤੇ ਵੀ ਔਂਕੜ ਹੈ ਉਹ ਕਦੇ ਕਦੇ ਆਉਣਾ ਮਿਸਪ੍ਰਿੰਟਾਂ ਦੀ ਆਪਾਂ ਗੱਲ ਕਰੀਏ ਜਿਹੜਾ ਗੁਰਬਾਣੀ ਵਿਆਕਰਣ ਦੇ ਹਿਸਾਬ ਨਾਲ ਸ੍ਰੀ ਰਾਗ ਸ਼ਬਦ ਤੇ ਵੀ ਚਾਹੀਦਾ ਔਂਕੜ ਮਹਲ ਤੇ ਵੀ ਚਾਹੀਦਾ ਅਰਥਾਂ ਦੇ ਨਾਲ ਆਪਾਂ ਯਾਦ ਰੱਖੋ ਜਦੋਂ ਉਹ ਆਊਗਾ ਨਾ ਟਾਈਮ ਠੀਕ ਹੈ ਜੀ ਸੋ ਦਾ ਜ਼ਿਆਦਾ ਜੋਰ ਇਹਨਾਂ ਚੀਜ਼ਾਂ ਤੇ मूल ਗੱਲ ਇਹ ਹੈ ਕਿ ਸ਼੍ਰੀ ਰਾਗ ਵਿੱਚ ਦੋ ਵਾਰ ਸ਼੍ਰੀ ਰਾਗ ਮਹੱਲ ਪਹਿਲਾ ਆਉਂਦਾ ਹੈ ਉੱਥੇ ਦੋ ਦੋ ਵਾਰ ਓਂਕੜ ਹੈ ਪਰ ਇੱਕ ਜਗ੍ਹਾ ਜਿੱਥੇ ਸ਼੍ਰੀ ਰਾਗ ਮਹੱਲ ਪਹਿਲਾ ਆਉਂਦਾ ਉੱਥੇ ਇੱਕ ਜਗ੍ਹਾ ਓਂਕੜ ਨਹੀਂ ਲਾਇਆ ਹੋਇਆ ਹੁਣ ਇਹ ਨਹੀਂ ਪਤਾ ਵੀ ਓਂਕੜ ਚਾਹੀਦਾ ਹੈ ਕਿ ਨਹੀਂ ਚਾਹੀਦਾ ਵਿਚਾਰ ਜੋ ਗੱਲ ਜਿਹੜੇ ਗੁਰਬਾਣੀ ਲਿਖਦੇ ਰਹੇ ਨੇ ਟਾਈਪ ਕਰਦੇ ਰਹੇ ਨੇ ਉਹਨਾਂ ਨੂੰ ਗੁਰਬਾਣੀ ਦਾ ਬੋਧ ਹੈ ਦੀ ਸੀ ਅਰਥ ਬੋਧ ਵੀ ਦੀ ਸੀ ਅਰਥ ਮਤਲਬ ਜਿੱਥੇ ਲਿਖਿਆ ਬਸੰਤ ਕੀ ਵਾਰ ਮਹੱਲ ਪੰਜਵਾਂ ਇਹ ਠੀਕ ਹੈ ਚਾਰ ਵਾਰ ਮਹੱਲ ਸ਼ਬਦ ਜਿਹੜਾ ਹੈਗਾ ਇਹ ਸਿਰਲੇਖ ਵੱਲੋਂ ਆਇਆ ਜੀ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ Alright